ਜਦ ਹੋਵਤ ਪ੍ਰਭ ਕੇਵਲ ਤਨੀ ਸਭ ਬੰਦ ਮੁਗਤ ਸੋ ਕਿਸ਼ਤੋ ਗਨੀ ਚਾਹੇ ਹੋਵਤ ਪ੍ਰਭ ਪ੍ਰਭ ਕੇਵਲ ਧਰੀ ਜਿੰਨਾ ਜਰੇ ਜੀਵ ਉਹ ਨਭ ਪੂਰਾ ਗਿਆਨवान ਹੁੰਦਾ ਹੈ ਪ੍ਰਭ ਗਿਆਨੀ ਹੁੰਦਾ ਹੈ ਧਰੀ ਧਰੀ ਕਹਿੰਦਾ ਗਿਆਨੀ ਸਾਰਾ ਗਿਆਨ ਜਿਹਦੇ ਕੋਲ ਹੈ ਤਨ ਗਿਆਨ ਹੈ ਨਾ ਨਾਮ ਪੜਾ ਨਾਮ ਤਾਂ ਹੈ ਗਿਆਨੀ ਕਹਤਾਂ ਨਾ ਜਾਦੇ ਦੇ ਕੋਲ ਨਾਮ ਤਾਂ ਹੁੰਦਾ ਹੈ ਸਾਰਾ ਖਜ਼ਾਨਾ ਨਾਮ ਦਾ ਹੁੰਦਾ ਹੁੰਦਾ ਤਾਂ ਨਹੀਂ ਹੁੰਦਾ ਸਕਦਾ ਨਾਮ ਤੇ ਆ ਮੁਕਤੀ ਬਣੀ ਹੰਦੀ ਜੋ ਮੁਕਤੀ ਵੀ ਨਾਮ ਤੋਂ ਛੱਲੇ ਆ ਦੇਖੋ ਬੰਦਨ ਥੱਲੇ ਨੇ ਮੁਕਤੀ ਹੁੰਦੀ ਹੈ ਉਦੋਂ ਮੁਕਤੀ ਆ ਗਈ ਮੁਕਤੀ ਤੋਂ ਬਾਅਦ ਨਾਮ ਆਇਆ ਉਗਦਾ ਬਪਰੀ ਵੀ ਗਿਆਨੀ ਜਗਾ ਬੁਕਤੀ ਦਾ ਥੱਲੇ ਆਉ ਤਾ ਉਹ ਬੰਨ ਮੁਕਤ ਕੌਣ ਹੈ ਉਹ ਦੱਸੀ ਜਿਸ ਸਟੇਜ 'ਤੇ ਬੈਠਾ ਤੀਜੀ ਬੁਜਤ 15 ਪਹਿਲੀ ਸੇ ਜਾਂ ਬੰਨਰ ਤੁਸੀਂ ਐਂ ਕਹਿੰਦੇ ਹੋ ਧਰਤੀ ਗਰਾਊਂਡ ਉਹ ਹੈਗਾ ਬੇਸਮੈਂਟ ਹੈ ਬੇਸਮੈਂਟ ਹੈ ਤਾਂ ਬੁਕਤੀ ਗਰਾਊਂਡ ਫਲੋਰ ਹੈ ਗਰਾਊਂਡ ਫਲੋਰ ਹੈ ਉਹ ਤਾਂ ਉੱਤਲੇ ਮੰਜ਼ਲ 'ਚ ਆ ਕੇ ਸਰੀ ਉਹ ਤਾਂ ਉੱਤਲੇ ਮੰਜ਼ਲ 'ਚ ਬੈਠਾ ਹੈ ਜੇ ਫਲੱਟ ਬਾਹਰ ਆਉ ਉਹ ਤਾਂ ਸਿੱਧਾ ਪਹੁੰਚਦਾ ਹੈਗਾ ਕਿਹਾ ਜਦਾ ਮਰਦ ਨੇ ਭੋਰੇ ਵਾਲੇ ਬੇਸਮੈਂਟ ਵਾਲੇ ਗੜੂ ਕੋਲ ਨਾਲ ਪਾਣੀ ਉੱਥੇ ਜੇ ਜਿਆਦਾ ਆ ਗਿਆ ਉਹ ਜਿਹੜਾ ਗਰਾਉਂਡ ਫਲੋਰ ਵਾਲਿਆਂ ਦੇ ਆ ਬੜੂ ਸੁਣੋ ਉਹ ਤਾਂ ਬਹੁਤ ਉੱਚਾ ਬੈਠਾ ਉੱਥੇ ਨਹੀਂ ਆਉਂਦਾ ਹੈ ਤੇਨੇ ਸੇ ਜਾਣੇ ਹਾਂ ਬੰਦ ਮੁਕਤ ਉਹ ਬੰਦਰ ਮੁਕਤ ਕਿਹਨੂੰ ਪੜ੍ਹਣਾ ਉਹ ਬੰਦਰ ਮੁਕਤ ਉਹ ਤਾਂ ਭੁਗਤੀ ਦੇ ਉੱਤੇ ਬੈਠਾ ਹੈ ਉਹ ਨਹੀਂ ਬੰਦ ਮੁਕਤ ਕੋ ਕਿਸ ਤੋਂ ਗਰੇ ਉਹ ਬੰਦ ਮੁਕਤ ਤਾਂ ਥੱਲੇ ਵਾਲਿਆਂ ਦੇ ਹੁੰਦੇ ਨੇ ਉਹਦਾ ਉੱਤੇ ਬੈਠਾ ਹੈ ਬੰਦਰ ਮੁਕਤ ਵਾਲਿਆਂ ਦੇ ਇਹਦਾ ਨਹੀਂ ਉਹ ਤਾਂ ਕਰਮੀ ਕਰਮੀ ਹੋਏ ਵਿਚਾਰ ਜਿਹੜੇ ਕਰਮੀ ਨੇ ਨਾ ਕਰਮਾਂ ਨੂੰ ਆਉਂਦੇ ਨੇ ਉਹਨਾਂ ਦੇ ਲੇਖੇ ਦੀ ਵਿਚਾਰ ਕਰਦੇ ਨੇ ਕਿ ਹੁਣ ਇਹਨੂੰ ਕਿਹੜੀ ਜੁਲੀ ਪਾਉਣੀ ਚਾਹੀਦੀ ਕਰਮੀਆਂ ਦੇ ਉੱਤੇ ਜਿਹੜੇ ਕਰਮ ਨੂੰ ਹੁੰਦੇ ਨੇ ਪੁਰਾਣ ਦੇ ਅਗਲੇ ਜਨਮ ਤੇ ਵਿਚਾਰ ਕਰਨ ਵਾਲਿਆਂ ਚ ਉਹ ਅਗਲੀ ਜਨਮ ਤੇ ਬੈਠਾ ਥੱਲੇ ਨਹੀਂ ਹੈਗਾ ਜਬ ਇੱਕੇ ਹਰ ਅਗੰਮ ਅਪਾਰ ਤਬ ਨਰਕ ਸੁਰਗ ਕੋ ਪਾਉਣ ਜਬ ਇੱਕੇ ਹਰ ਜਹ ਹਰ ਇੱਕ ਹੈ ਆਪ ਹੋਰ ਕੋਈ ਹੈ ਨੀ ਸਭ ਇੱਕਤਾ ਹੈ ਕਿ ਕੋਈ ਕਹ ਉਹ ਉਧਾਂ ਜਾਗਾ ਜਣਾ ਹੈ ਦੀ ਇਹ ਉਦੋਂ ਦੀ ਗੱਲ ਹੈ ਜਾਂ ਰਚਨਾ ਬਿਲਕੁਲ ਨਹੀਂ ਹੈ ਜੀ ਸਾਰੇ ਇੱਕ ਨੇ ਸਭ ਜੂਰ ਨੇ ਜਦ ਇੱਕ ਹੈ ਹਰ ਅਗੰਬ ਅਪਾਰ ਅਗੰਬ ਅਪਾਰ ਉਹ ਅਗੰਬ ਅਪਾਰ ਦੇ ਬੁੱਧੀ ਦੇ ਪਰ ਹਾਂ ਤਬ ਨਰਕ ਸੁਰਗ ਕੋ ਕੌਣ અવਤਾਰ ਨਾ ਕੋਈ ਨਰਕਾ ਨਾ ਕੋਈ ਸੁਰਗਾ ਨਾ ਕੋਈ ਤੇ ਤੇ ਨਰਕ ਸੁਰਗਾ ਦਾ અવਤਾਰ ਹੈ ਤੀ ਜਿੱਥੇ ਤੇ ਕਿਸੇ ਨਹੀਂ ਸ਼ਿਵਜੀ ਨਹੀਂ ਸਾਰੇ ਕੁਝ ਹੋ ਗਿਆ ਨਾ ਨਰਕਾ ਨਾ ਸੁਰਗਾ ਨਾ ਕੋਈ અવਤਾਰ ਹੈ ਉਹ ਤੋਂ ਬਾਅਦ ਸ੍ਰਿਸ਼ਟੀ ਦੇ ਸੁੱਖ ਦੇ ਪੈਦਾ ਹੋਈ ਇਹ ਕਰਜ਼ ਕਰਦੇ ਨੇ ਇਹ ਬਿਸ਼ੂ ਤੋਂ ਸਿੱਧੀ ਜੇ ਕਰਜ਼ ਨੇ ਫਿਰ ਬਿਸ਼ੂ ਕਿੱਥੇ ਨਹੀਂ ਸੁਰਗ ਵਿੱਚ ਉਦੋਂ ਤਾਂ ਕਹਿੰਦੇ ਸੁਰਗ ਹੈ ਨਹੀਂ 베ਦ ਕਹਿੰਦਾ ਮੰਦਾ ਸੁਰਗ ਹੈ ਨਹੀਂ 베ਦ ਵਿੱਚੋਂ ਫੜੇ ਨੇ ਇਹ ਇਹ ਜਿਹੜੇ ਸੰਬਲ ਚ ਫਰਜੀ ਲਿਖੇ ਹੋ ਨੇ ਉਹ ਆ ਕਹੇ 베ਦ ਵਿੱਚਾਂ ਲਿਖਿਆ ਹੈ ਉਹ ਤੋਂ ਕੁਝ ਵੀ ਨਹੀਂ ਹੈ ਤੁਸੀਂ ਕਿੱਥੋਂ ਇਹ ਮੰਨ ਲਿਆ ਵੀ ਹੈਗਾ ਚੁੱਪ ਕਰਕੇ ਉੱਠ ਕੇ ਚਲੇ ਗਏ ਛੁੱਟ ਗਏ ਸੁਣ ਕੇ ਜੇ ਗੁਰਦਾਸ ਸਿੰਘ ਬਾਰਾਂ ਦੇ ਘਰ ਜਾ ਕੇ ਉੱਠ ਗਏ ਕਹਿੰਦੇ ਜੀ ਗੁਰਦਾਸ ਸਿੰਘ ਬਾਰਾਂ ਨੂੰ ਛੱਡ ਦੇ ਗੁਰੂ ਗ੍ਰੰਥ ਸਾਹਿਬ ਅਸੀਂ ਛੱਡ ਦਾਂਗੇ ਇਹ ਕਹਿ ਕੇ ਭਜਦੇ ਨੇ ਫਿਰ ਜਾਂ ਕੁਰਬਾਨੀ ਖੇਲ ਲੈਂਦੀ ਹੈ ਗੁਰਦਾਸ ਸਿੰਘ ਬਾਰਾਂ ਵਾਲੇ ਨੂੰ ਜਾਂ ਇਤਿਹਾਸ ਵਾਲੇ ਨੂੰ ਫਿਰ ਕਹਿੰਦਾ ਅਸੀਂ ਤਾਂ ਕੁਰਬਾਨੀ ਨੂੰ ਤਾਂ ਚਾਹੇ ਛੱਡ ਦਈਏ ਇਹਨਾਂ ਨੂੰ ਕਿਸੇ ਨੂੰ ਨਹੀਂ ਛੱਡਦੇ ਕਿਉਂ ਵੀਲੇ ਦੇ ਨਾ ਹੋ ਗੁਰਬਾਨੀ ਦਾ ਬਹੁਤ ਥੋੜੀ ਪਹਿਲਾਂ ਛੱਡੀ ਹੋਈ ਆ ਉਹ ਗੁਰੂ ਉਹ ਕੁਰਬਾਨੀ ਦਾ ਪਹਿਲਾਂ ਹੀ ਛੱਡੀ ਆ ਸਾਨੂੰ ਤਾਂ ਪਤਾ ਹੈ ਚੱਦਾ ਹੋਇਆ ਤੁਸੀਂ ਬਿਆਨ ਦੇ ਦਿੱਤਾ ਇਹ ਤਾਂ ਤੁਹਾਡੇ ਮੂੰਹ ਤੇ ਕਹੋਣਾ ਹੀ ਸੀ ਵੇਦਾ ਤੋਂ ਤੋਂ ਹੀ ਘੋਣਾ ਸੀ ਅਸੀਂ ਸਾਨੂੰ ਤਾਂ ਪਤਾ ਵੀ ਛੱਡੀ ਹੋਈ ਐ ਤੁਹਾਡੀ ਇਹ ਤਾਂ ਵੀਣਿਆ ਦੀ ਛੱਡੀ ਹੋਈ ਸੀ ਪਹਿਲਾਂ ਵੀਣਿਆ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਗੁਰੂ ਤੇ ਦੇ ਵੀ ਗੁਰੂ ਸੀ ਵੀਣਿਆ ਦਾ ਗੁਰੂ ਕੌਣ ਸੀ ਪਾਡਾ ਪਡਾ ਉਹਨਾਂ ਦੀ ਛੱਡੀ ਹੋਈ ਐ ਜਿਹਨੇ ਬਾੜ ਪਾੜੀ ਸੀ ਬੰਦ ਲਦਾ ਉਹਨਾਂ ਦੀ ਛੱਡੀ ਹੋਈ ਐ ਛੋਡੇ ਹੋ ਗੁਰੂ ਨੇ ਸਾਡੇ ਧਲੇ ਨੇ ਤੁਸੀਂ ਸਾਡੇ ਘਰ ਆਵਲੇ ਸਾਨੂੰ ਅਲੀਡ ਕਰਨਾ ਅੱਗੇ ਹੁਣ ਜਾ ਫੜੇ ਜਦੋਂ ਸੱਡੀ ਉੱਪਰ ਚੋਰ ਪਾ ਲਾਉਂਦਾ ਚੋਰ ਫੜਿਆ ਜਾਵੇ ਬਿਆਨ ਕੀ ਦਵੇ ਬਿਆਨ ਨਹੀਂ ਦੇ ਸਰਦਾ ਕੋਰਟ ਵਿੱਚ ਕੁਝ ਵੀ ਕੀ ਕਹੂੰ ਬਿਆਨ ਕੀ ਦੇਣ ਵਿਚਾਰੇ ਚੁੱਪ ਰਹੇ ਸਿੱਤਰ ਵੀ ਖਾਈ ਜਾਂਦੇ ਨੇ ਕਿ ਖੂਬੀ ਜਾਨੀ ਜਦ ਨਿਰਗੁਣ ਪ੍ਰਭ ਸਹਿਜ ਸੁਭਾਏ ਤਦ ਸਿਰ ਸ਼ਕਤੀ ਕੋ ਕਿਤਨ ਾਏ ਜਦ ਨਿਰਗੁਣ ਪ੍ਰਭ ਸਹਿਜ ਸੁਭਾਏ ਜਿਹੜਾ ਨਿਰਗੁਣ ਪ੍ਰਭ ਹੈ ਨਾ ਨਰਗੁਣ ਪ੍ਰਭ ਕਾਸੀ ਉਹ ਸੁੱਤ ਸਮਾਗ ਸੀ ਜਿਹੜਾ ਜਦ ਸੁੱਤ ਸਮਾਗ ਸੀ ਜਦ ਨਿਰਗੁਣ ਪ੍ਰਭ ਸੁਤ ਸਮਾਗ ਸਹਿਜ ਅਵਸਥਾ ਜਾ ਜਾਂਦਾ ਸਹਿਜ ਅਵਸਥਾ ਕੀ ਆ ਕੇ ਹੁੰਦਾ ਪਰਪਰਮ ਹੁੰਦਾ ਜਦ ਨਿਰਗੁਣ ਪ੍ਰਭ ਸਹਿਜ ਸੁਭਾਏ ਸਹਿਜ ਅਵਸਥਾ ਜਾ ਕੇ ਪਰਪਰਮ ਦੀ ਅਵਸਥਾ ਤਾਨੂ ਕਰ ਗਿਆ ਪਰਪਰਮ ਹੋ ਗਿਆ ਸ੍ਰਿਸ਼ਟੀ ਸ੍ਰਿਸ਼ਟੀ ਰਚਨਾ ਵਾਸਤੇ ਤਿਆਰ ਹੋ ਗਿਆ ਕਾਬ ਸਿਰ ਸੱਤੀ ਸਮੋ ਜੀ ਬਣਾਉਣ ਲੱਗ ਗਿਆ ਆ ਕੀ ਕਰੀਏ ਫਿਰ ਇਹੀ ਸੋਚਦੇ ਆ ਜਿਨਾਂ ਦੇ ਸੁੱਤੇ ਆਂ ਸੁੱਤੇ ਆਂ ਜਾਂ ਜਾਗ ਹੁੰਦੀ ਆ ਫਿਰ ਅੱਪਾ ਕੱਬਾਰੇ ਸੋਚਦੇ ਆਂ ਅੱਜ ਨਾ ਕੋਈ ਫੁਰਨਾ ਆਉਂਦਾ ਹੀ ਨਾ ਹੰਦੜ ਸ਼ਾਇਦ ਸਰਗੁਣ ਦੇ ਵਿੱਚ ਆ ਕੇ ਹੋ ਅਵਸਥਾ ਕਿਆ ਗਿਆ ਜਾਗ ਪਿਆ ਆ ਗਿਆ ਸਸ ਸਭਜਤ ਸਹਜ ਉਪਾਇ ਜਦੋਂ ਕੋਣ ਵਾਸਤੇ ਪਾਰਵਤੀ ਉਹ ਕਿੱਥੇ ਸੀ ਬਈ ਉਹ ਤਾਂ ਪਹਿਲਾਂ ਉਹਨੇ ਪਹਿਲਾਂ ਹੁਣ ਕਰੂਗਾ ਉਦੋਂ ਹੋ ਜਾਓ ਤਾਂ ਪਹਿਲਾਂ ਕਰੂਗਾ ਉਹ ਉਦੋਂ ਕਿੱਥੇ ਲਿਓ ਅਜੋ ਤਾਂ ਸੁੱਕਾ ਤੇ ਆਦਮੀ ਉੱਠਿਆ ਉਹਨੇ ਸੰਸਾਰ ਪੈਦਾ ਕਰ ਗੋ ਤੁਸੀਂ ਕਹਿੰਦੇ ਛਿਪ ਸ਼ਕਤੀ ਉਹ ਫਿਰ ਕਦੇ ਹੋਉਂ ਰਿਓ ਦੱਸੋ ਕਿੱਥੇ ਦੀ ਸੁਰਗਨਾਦ ਦਾ ਹੈ ਨਹੀਂ ਸੀ ਦੋਇ ਪਹਿਲਾਂ ਕਹੇਤਾ ਗੋ ਸੁਰਗਨਾਦ ਨੇ ਲੋਕੇ ਉਹ ਜਗ੍ਹਾ ਦਾ ਨਾਂ ਦੱਸੋ ਕਿ ਛਿਪ ਸ਼ਕਤੀ ਕਹੋ ਕਿ ਦੱਸੋ ਉਹ ਜਗ੍ਹਾ ਦਾ ਨਾਂ ਤੁਸੀਂ ਲਿਖਿਆ ਕਿ ਕਿੱਥੇ ਦੱਸੋ ਝੂਠਿਆਂ ਕੋਲ ਪੀਸ ਤੱਕ ਕੋਈ ਨਹੀਂ ਤੇ ਚੁੱਪ ਨਾ ਪੁੱਛਿਆ ਮੁਸਲਮਾਨਾਂ ਨੂੰ ਫਾਈ ਠੀਕ ਹੈ ਸੁਰਗਨਾਸਰ ਤੁਸੀਂ ਵੀ ਸੁਰਗਨਾਸਰ ਨੂੰ ਜਦ ਤੁਝ ਕਹਿਤਾਂ ਵਧੀਆ ਤੁਸੀਂ ਨਕਲ ਕਰ ਲਈ ਸਿੱਧੂ ਕਹਿੰਦੀ ਹੋ ਨਕਲ ਕਰ ਲਈ ਅਸੀਂ ਤਾਂ ਬੰਦੇ ਦੀ ਸੁਰਗਨਾਸਰ ਨੂੰ ਅਸੀਂ ਤਾਂ ਬੰਦੇ ਦੀ ਹਰਵਾਣੀ ਨਹੀਂ ਬੰਦੀ ਇਹ ਉਦੋਂ ਹੀ ਜੇ ਹੁਣ ਨੇ ਤਾਂ ਭੱਪ ਸਾਹਿਬ ਦੇ ਵਿੱਚੇ ਨੇ ਸੁਰਗਨਾਸਰ ਤੁਹਾਡੇ ਜਿਹੜੇ ਨੇ ਕਲਪੇ ਹੋਏ ਨੇ ਭੱਪ ਸਾਹਿਬ ਦੇ ਪਿੱਛੇ ਨੇ ਸੁਰਗਜੋਨ ਹੈ ਜਿਹੜੇ ਅਫਸਰ ਨੇ ਜਿਹੜੇ ਦੇ ਵਿੱਚ ਜਰ ਕਿ ਜੋ ਨਾਲ ਲੱਕੈ ਜੀਨੇ ਉਹ ਲੈ ਕੈ ਜੀਨੇ ਉਹ ਨਕੀਨਾ ਜੀਵੋ ਜਿਹੜੇ ਪੁੱਤੇ ਅਫਸਰ ਨੇ ਪੁਲਿਸ ਵਾਲੇ ਨੇ ਸਰਗ ਵਾਲੇ ਨੇ ਬਸ ਐਂਡੇ ਫਰਕਾ ਉਹਨਾਂ ਕੋਲ ਪਾਵਰ ਹੈ ਸਰਗ ਵਾਲਿਆਂ ਕੋ ਉਹਨਾਂ ਕੋਲ ਬਚਾਰਿਆਂ ਕੋ ਹੈ ਨਹੀਂ ਉਹ ਹਕੂਮਤ ਕਰਦੇ ਨੇ ਉਹਨਾਂ ਦੇ ਹਕੂਮਤ ਹੋ ਰਹੀ ਹੈ ਸਰਗ ਨਹੀਂ ਮਤਲਬ ਸਾਡੇ ਕੋਲ ਤਾਂ ਐਂ ਤਾਂ ਦੋ ਹੀ ਜੈ ਓ ਤੁਸੀਂ ਇਹ ਦੱਸੋ ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਦੁਬਾਰਾ ਜਨਮ ਲਈ ਇੱਛਾ ਹੁੰਦਾ ਜਿਹੜੇ ਜੀਵ ਨੇ ਉਹ ਇੱਕੋ ਬਾਾਰ ਇਹਨੇ ਪੈਦਾ ਕਰ ਲਏ ਫਰਮੇਸ਼ਰ ਦੇ ਉਹ ਜਿਹਨੇ ਮਰਜੀ ਜਪਰੀ ਜਾਨ ਜਿਹਨੇ ਮਰਜ਼ੀ ਮਰੀ ਜਾਨ ਦੁਬਾਰਾ ਜਨਮ ਲੈਣ ਦੀ ਲੋੜ ਢੀ ਉਹ ਖਜ਼ਾਨਾ ਐਡਾ ਬੜਾ ਉਹ ਮੁਕਦਾ ਹੀ ਨਹੀਂ ਨਾ ਹੋਣਾ ਉਹਦਾ ਤਾਂ ਥੋੜਾ ਜਿਹਾ ਹਿਸਾਬ ਜਿਹਾ ਜੋ ਹਿੱਲਿਆ ਅਖੋਦਾ ਨਾਮ ਕੀ ਉਹ ਜਾਂਦੇ ਦਾ ਕਹਿੰਦੇ ਤਾਂ ਪਤਾ ਨਹੀਂ ਨਾ ਭੱਜੀ ਹੈ ਨਾ ਉਹਦਾ ਨਾਮ ਦਾ ਰੱਖ ਲੈਂਦੇ ਕੋਈ ਉਹ ਵੀ ਨਾਮ ਦਾ ਰੱਖੋ ਜੰਨਤਦੋਜਿਕ ਦਾ ਨੌ ਰਖਲੇ ਉਹ ਰਖੇ ਹੀ ਜਾਨੇ ਦਾ ਫੇਰ ਨੇ ਦਾ ਜਿੱਥੇ ਸੁਣਾਉਂਦੀ ਆ ਜਿੱਥੇ ਸੁਣਾਉਂਦਾ ਆ ਆ ਜੰਨਤ ਜੰਨਤਦੋਜਿਕ ਦੀ ਇਹ ਲੋੜ ਨਹੀਂ ਕੋਈ 14ਵੀਂ ਸਦੀ ਦੇ ਬਾਅਦ ਕੋਈ ਜੰਨਤ ਦੋਜਿਕ ਦੀ ਲੋੜ ਪੈਣੀ ਹੈ ਜਿਹੜਾ ਹਿਸਾਬ ਕਰਨਾ ਖੁਦਾ ਨੇ ਉਦੋਂ ਕੋਈ ਜੀਵ ਜਿਹੜੇ ਨੇ ਹਲੇ ਕਬਰਾਂ 'ਚੇ ਪਏ ਨੇ ਕੋਈ ਸੁਰਗਤ ਜਾਣਗੇ ਕੋਈ ਨਰਕਤ ਜਾਣਗੇ ਉਹਦੀ ਲੋੜ ਹੈ ਨਹੀਂ ਉਹ ਬੜਾਈ ਬੈਠੇ ਹੋ ਜਿਹਦੀ ਜਿਹੜਾ ਹੈਗਾ ਉਹਦਾ ਨਾਮ ਕੋਈ ਨਹੀਂ ਤੁਹਾਡੇ ਕੋਲ ਕਿਉਂ ਝੂਠ ਬੋਲਦੇ ਆਂ اے بھجی کاڑی بولی چلنا کاندے باتو آپ کی صحیح ہے لیکن کہیں بڑے مولوی سے پوچھیں بات ਸਵਾਲ ہے ایک سوال ਨਾਲ ہی ساری تحس ہو گئی۔ اسلام میں توس ہو گیا۔ او خیانے داروں کیو بیٹھے ہو تو بھی سی ہوتے۔ او کاندے بہت زور کا سوال کیا اجیا جی آپ ਕਮੈ ਨਹੀਂ ਪਤਾ ਤਾਂ ਆ ਵੀ ਇਹ ਹਵਾਰੇ ਸਾਹਮਣੇ ਬਾਤ ਕਰਦੇ ਕਿ ਇਹ ਹੀ ਸਵਾਲ ਰੱਖਾ ਕਰੇ ਕੋ ਇਹਨਾਂ ਨੂੰ ਪਹਿਲਾਂ ਲੱਦੇ ਤੇ ਰੋਜ਼ ਮੋਜ਼ ਬੁਝਾ ਕਰਦੇ ਸਨ ਤਾਂ ਆਪਸ ਵਿੱਚ ਉਹ ਇਹਨਾਂ ਨੂੰ ਇਹ ਜੀ ਗੱਲਾਂ ਪੁਝਾ-ਪੁਝਾ ਕਰਦੇ ਕਹਿੰਦੇ ਦੇਖੋ ਜੀ ਕਹਿੰਦੇ ਜੀ ਹਮਾਰੇ ਜੋ ਭਈਆ ਹੈ ਨਾ ਇਹ ਸਿੱਧੂ ਭਈਆ ਤੇ ਬੁੱਧੂ ਆਦਮੀ ਹੈ ਵੈਸੇ ਆਦਮੀ ਵੈਸੇ ਸਹੀ ਹੈ ਬੁਰੇ ਨਹੀਂ ਹੈ ਸਕੇ ਥੋੜਾ ਜਿਹਾ ਕਲਕੇ ਬੁੱਧੂ ਹੈ ਹਾਂ ਕਿਉਂ ਕਹਿੰਦਾ ਗਊ ਕੋ ਮਾਤਾ ਕਹਿੰਦੇ ਐ ਸਾਡ ਕੋ ਬਾਫਲੀ ਕਹਿੰਦੇ ਫਿਰ ਉਹ ਭੱਜ ਜਾਂਦੇ ਕਹਿ ਕੇ ਜਿਉਂ ਜਿਉਂ ਨਾਲ ਦੀ ਬਈ ਭੱਜੇ ਕੋਟੇ ਕਹਿੰਦਾ ਲੇ ਲੇ ਗੋ ਸਹੀ ਕਹਿ ਜਵਾਂ ਮਜ਼ਾਕ ਹੀ ਕਰਨਾ ਕਰਦੇ ਕਹਿੰਦਾ ਸਾਡ ਕੋ ਬਾਫ ਕਹਿੰਦੇ ਮੈਂ ਪਤਾ ਨਹੀਂ ਕੀ ਕਰੇ ਜਾ ਗਊ ਕੋ ਮਾਤਾ ਕਹਿੰਦੇ ਓਏ ਜਨ ਅੱਲਾਹ ਆਪ ਤੁਸੀਂ ਕੀ ਮਜ਼ਾਕ ਕਰ ਲੈਂਦੇ ਸੀ ਹਾਂ ਜਦ ਆਪੇ ਆਪ ਆਪਣੀ ਜੋਤ ਉੱਤਰ ਹੈ ਤਦ ਕਬਰ ਨਦਰ ਮੁਕਾਬਲ ਕਬਰ ਤਰ ਹੈ ਜਦ ਜਦ ਆਪਨਾ ਆਪਣੀ ਜੋਤ ਆਪਣੀ ਉੱਤਰ ਹੈ ਜਦੋਂ ਅੰਤਰ ਭੁਖੀ ਹੋ ਕੇ ਬਹਿ ਗਿਆ ਜਦੋਂ ਪੂਰਨ ਬ੍ਰਹਮਾ ਹੈ ਉਹ ਸੁਧਵਾ ਦੇ ਹੈ ਜਦ ਆਪੇ ਆਪ ਆਪਣੀ ਜੋਤ ਹੈ ਸੁਣ ਹੁੰਦਾ ਤਾੜੀ ਲਾਈ ਆਦਮੀ ਜਾਗਦਾ ਆਦਮੀ ਜਾਗਦਾ ਪਰ ਕੁਛ ਸੋਚਦਾ ਤੇ ਉਹ ਅਵਸਥਾ ਤੇ ਕੱਲ ਸੁੱਤੇ ਹੋਦੀ ਉਹ ਅਸਾ ਸੁਨਸਵਾਦੀ ਇੱਕ ਜਾਗਦਾ ਹੈ ਸੋਚਦਾ ਕੁਝ ਜਦ ਆਪਨ ਆਪਣੀ ਜੋਤ ਜਦ ਆਪੇ ਆਪ ਆਪਣੀ ਜੋਤ ਅੱਦਰ ਜਾਂ ਅੰਦਰੁਖੀ ਹੋਇਆ ਹੋਇਆ ਕੁਝ ਵੀ ਸੋਚਦਾ ਦੀ ਹੈ ਜਾਗਦਾ ਵੀ ਹੈ ਸੋਚਦਾ ਵੀ ਕੁਝ जे پتا اے واسطا لے لیئے اپن اک اے واسطا وی تا ہے کہ اے اوسر توں سی لے لوں کوئی آدمی اپنی جوت اپنے بچی تے اپنا ماں اپنے بچی تے کایا ہویا اے ا تا اپن دی وجہ اکھاں دے تے کٹی اے ਜੇ ਆਊਗਾ ਧਮਾਲ ਕੀ ਆਊਗਾ ਤਾਂ ਜੁੜੂਗਾ ਸਰ ਸਟੂਡੈਂਟ ਨਹੀਂ ਜੁੜਦਾ ਹੀ ਕਿਸੇ ਇਸ ਜੋਤੀ ਜੋਤ ਸਮਾਈ ਕਹਿੰਦੇ ਨੇ ਇਹ ਜੋਤੀ ਜੋਤ ਸਮਾਈ ਹੋ ਜਾਂਦੀ ਹੈ ਇਹ ਸਭੀ ਜੋਤੀ ਜੋਤ ਸਮਾਉਣਾ ਕਹਿੰਦੇ ਨੇ ਕਿਹਾ ਜਾਂਦਾ ਜੋਤੀ ਜੋਤ ਸਮਾਈ ਆਹੀ ਹੈ ਉਹ ਜਦ ਆਪੇ ਆਪ ਕੋਈ ਕਹੇ ਦੇ ਵਿੱਚ ਆ ਕੇ ਸ੍ਰੀ ਛੱਡਿਆ ਜਾਂਦਾ ਇਹ ਵਸਤਾ ਸ੍ਰੀ ਛੱਡਣ ਦੀ ਹੈ ਜਦ ਆਪਣ ਜਦ ਆਪਣੇ ਆਪਣੀ ਜੋਤ ਕਰੇ ਆਪੇ ਆਪਾਂ ਨੂੰ है ਅੰਦਰ ਮੁਕੀ ਹੋ ਕੇ ਟਿਕਾ ਲੈਣਾ ਸਹੀ ਹੋਈਆ ਤਾਂ ਉਹ ਵਸਦਾ ਕਵਨ ਕੱਟ ਕਰੇ ਇਹ ਉਹ ਵਸਦਾ ਜਦੋਂ ਆਰਾਧਨਾ ਦੀ ਵਸਤ ਹੈ ਜਦੋਂ ਨਾਮ ਬੁਗਦਾ ਨਾਮ ਕਮਾਂਗਾ ਨਾਮਦਾਨ ਕਿਰਪਾ ਕਰੋ ਫਰੇ ਕਿਰਪਾ ਕਰੋ ਨਾਮ ਵਸੇ ਨਾਮ ਦੀ ਵੀ ਆਪਣੇ ਆਪ ਕੁਛ ਨਹੀਂ ਕਰ ਸਕਦਾ ਜੋ ਦਊਗਾ ਸਭ ਨੂੰ ਇਹ ਅਰਾਧਨਾ ਦੀ ਹੈ ਅਰਾਧਨਾ ਆਰਾਧਾ ਦੀ ਕਹ ਹਰ ਨਾਮ ਮਿਲਣਾ ਨਹੀਂ ਕੋਸ਼ਿਸ਼ ਕੁਝ ਦੀ ਪਲੈਨ ਕੋਈ ਨਹੀਂ ਅਰਾਧਨਾ ਦਾ ਨਾਨਕ ਬੋਗੈ ਨਾਮ ਦਾ ਨਾਨਕ ਨਾਮ मिले ताही मुझे तो नाम दे भी मेरा साथी बन हो गए ये आदर अपने अंदर है अपनी ज्योत तेरी जब आप अपनी ज्योत है तब कबर निडर तो तो तो। का कबर में टेप है डरदा कौन है निडर कौन है उधर तो डर है ही डरता मुक्ति से आगे खत्म हो गया सी तो उर्दू कहानी उसका मुक्त हो गया भय मुक्त ਉਹ ਜਿਹੜੇ ਭੈ ਭੈ ਮੁਕਤ ਆ ਰਹੇ ਪਰ ਮੁਕਤ ਪੈ ਮੁਕਤ ਸਭ ਤੋਂ ਮੁਕਤ ਹੋਸੀ ਤਕੀਏ ਜਦ ਦੀ ਜਾਂਦਾ ਹਾਂ ਡਰ ਹੈ ਯਾਰ ਕਿਨੂੰ ਆ ਕੀ ਤੋਂ ਡਰ ਹੈ ਉਹ ਤਾਂ ਇਸ ਕਾਇਆ ਜੇ ਧੋੜੇ ਧੋ ਦਾ ਡਰ ਹੁੰਦਾ ਕਿਨੂੰ ਧੋਏ ਤੋਂ ਡਰ ਹੈ ਇਕੱਲੇ ਨੂੰ ਕੀ ਤੋਂ ਡਰ ਹੈ ਜੇ ਤਹੀ ਇਕੱਲਾ ਦੁਆ ਹੈ ਹੀ ਜਿੰਨੇ ਇੱਕ ਭਾਈ ਹੈ ਕੋਈ ਦੂਆ ਦਾ ਭਾਈ ਹੋਰੀ ਕੋਈ ਉਹਨੂੰ ਕਹਾਗਾ ਦਾਰਾ ਦਾ ਉਹਦਾ ਕੱਲੇ ਦੀ ਮਾਲਕ ਹੈ ਕੱਲਾ ਮਾਲਕ ਹੈ ਰਾਜਾ ਬਣੂ ਨੂੰ ਕੱਲੇ ਨੇ ਬਣੂ ਕੋਈ ਹੈ ਚਿੰਤਾ ਦਾ ਉੱਥੇ ਜਿੱਤੇ ਅਰਾਮੀ ਦੇ ਕੋਲ ਚਾਰ ਭਾਈ ਸੀ ਉੱਥੇ ਚਿੰਤਾ ਸੀ ਵੀ ਕੋਲ ਰਾਜਾ ਬਣੂ ਬੱਚੇ ਉੱਥੇ ਚਿੰਤਾ ਉੱਥੇ ਉੱਥੇ ਹੁੰਦੀ ਹੈ ਜਿੱਤੇ ਦੋ ਹੂਣ ਘੱਟੋ ਘੱਟ ਇਹ ਤਾਂ ਉੱਥੇ ਚਿੰਤਾ ਗਾਦੀ ਹੈ ਤੋ ਵਾਰ ਸਹੀ ਹੈ ਦੂਏ ਤੋਂ ਡਰ ਹੁਕਾ ਬਸ ਤੋਇਸ ਲੋਪ ਅਪਨ ਚਲਤ ਆਪ ਕਰਨੇ ਹਾਰ ਨਾਮਿਤ ਫਾਦਰ ਅਗੰਮ ਅਪਾਰ ਆਪਨ ਜਲਤ ਆਪ ਕਰਨੇ ਹਾਰ ਇਹ ਜਿਹੜੇ ਚਲਤਰ ਕਰਦਾ ਇਹ ਚਲਤਰ ਜਿਹੜੇ ਨੇ ਨਾ ਇਹ ਜਿਹੜੇ ਚਲਤਰ ਕੀਤੇ ਨੇ ਉਹੀ ਇਹ ਵਰਦਾ ਫਿਰਦਾ ਉਹ ਤਰੀਆ ਜਿਹੜੇ ਸੇ ਸੇ ਜਿਹੜੇ ਨੇ ਹੋਰ ਵੀ ਦੇ ਆਪਣ ਚਲਤ ਜਿੱਦੇ ਕਿ ਲੱਤਰ ਕਰਦਾ ਮਨ ਆਪ ਕਰਦਾ ਜਦੋਂ ਆਰਾਮ ਹੋਰੀ ਕਰਦਾ ਡਰਦਾ ਕਰਦਾ ਆਪ ਕਰਦਾ ਇਹ ਦੋ ਹੋ ਕੇ ਕਰਦਾ ਫਿਰੇ ਆਪਣੀ ਜੋਤ ਆਪਣੇ ਅੰਦਰ ਜਰ ਨਹੀਂ ਟਿਕਾਉਂਦਾ ਤਾਂ ਸਭ ਪਖੜਾ ਹੁੰਦਾ ਫਿਰ ਆਪਣੀ ਜੋਤ ਆਪਣੇ ਅੰਦਰ ਟਿਕਾ ਕੇ ਰੱਖੇ ਫਿਰ ਕਹਦਾ ਜਦੋਂ ਆਪਣੀ ਜੋਤ ਨੂੰ ਆਪਣੇ ਮਾਤੂ ਖੁੱਲਾ ਛੜ ਰੁੱਦਾ ਜੇ ਪਸ਼ੂ ਆਪਾਂ ਖੁੱਲਾ ਛੱਡਾਂਗੇ ਬਾਹਰ ਤਾਂ ਕਿਸੇ ਦੇ ਜੇ ਬੱਚਾ ਵੀ ਆਪਾਂ ਖੁੱਲਾ ਛੱਡਾਂਗੇ ਆਲਾ ਪਤਾ ਨਹੀਂ ਆਊਗਾ ਡਰ ਵੀ ਹੈ ਵੀ ਬਾਹਰ ਬੱਚਾ ਨਿਕਲ ਗਿਆ ਕੋਈ ਸਕੂਲ ਵਾਲਾ ਕੋਈ ਹੋਰ ਖਤਰਾ ਵੀ ਹੈ ਜਰ ਹੋ ਗਿਆ ਖਤਰਾ ਕੋਈ ਸ਼ਰਾਰਤ ਕਰੂਗੇ ਨਿਆਣੇ ਨਾਲ ਲੜੂ ਜੇ ਆਪਣੇ ਮੰਦੀ ਆਪ ਸੰਭਾਲ ਕੀਤੀ ਆਪਣੇ ਕੰਟਰੋਲ ਚ ਹੈ ਤਾਂ ਇਹ ਤੋਂ ਬੁੱਧੀ ਮੰਨ ਨਹੀਂ ਜਦੋਂ ਕਰਨਾ ਪੈਗਾ ਜਦੋਂ ਇਹ ਜਿਹੜੀ ਗੱਲ ਤੋਂ ਕਮ ਜੇ ਮਨ ਜੋਤ ਜੇ ਆਪਰ ਜੋਤ ਆਪਣਾ ਮਨ ਦੀ ਗੱਲ ਹੈ ਮਨ ਜੋ ਸਰੂਪ ਹੈ ਆਪਰ ਜੋਤ ਦਾ ਮਤਲਬ ਆਪਣਾ ਮਨ ਹੈ ਜੇ ਆਪਣਾ ਮਨ ਆਪਣੇ ਕਾਬੂ ਚ ਰੱਖਿਆ ਹੋਇਆ ਤਾਂ ਕੋਈ ਡਰਦੀ ਜਦੋਂ ਆਪਣਾ ਮਨ بے ਹੁੰਦਾ ਹੈ ਪੈ ਜਾਂਦਾ ਪੈਦਾ ਹੁੰਦਾ ਜੇ ਮਨ ਕਾਬੂ ਨਹੀਂ ਹੋ ਚੋਰੀ ਕਰੂ ਕੋਈ ਅਪਰਾਧ ਕਰੂ ਮਨ ਕਾਬੂ ਜਾਣਾ ਕੋਈ ਸਾਡਾ ਕੰਮ ਕਰਨਾ ਹੈ ਸਾਡਾ ਕੰਮ ਕਰੂਗਾ ਤਦਾਰਾ ਸਾਡਾ ਕੰਮ ਤੇ ਕਰੂੜੀ ਤੜੜੀ ਕਬੂਸ ਕਬੂਸ ਡਰਦਾ ਹੈ ਵੀਰ ਹੋਏ ਆਪਨ ਜਲਤ ਆਪ ਕਰਨੇ ਹਾਰ ਆਪਨ ਜਲਤ ਆਪਨ ਜਲਤ ਜੇ ਪਰ ਮਨ ਜੇ ਤੇ ਹਿਰਦੈ ਮੇਂ ਬੋਲੂ ਕੋਈ ਚਲੇ ਤਰ ਕੱਲ ਕੋਈ ਬਿਰੂ ਕੜਾ ਕੋਈ ਦੇਖਦਾ ਏ ਆਪੇ ਕੋਈ ਹੰਕੂ ਜ਼ਰੂਰ ਕਰ ਲੈ ਹੈ ਉਲਟਾ ਵੀ ਬੰਦੂ ਕੜਾ ਕੋਈ ਦੇਖਦਾ ਆਪਣੇ ਚਲਤਾਫ ਕਰਨੇ ਹਾਰ ਆਪੇ ਚੌਧਰੀ ਬਣਨਾ ਚਾਹੁੰਦਾ ਆਪੇ ਪਰਮੇਸ਼ਰ ਬਣਨਾ ਚਾਹੁੰਦਾ ਆਪੇ ਆਪਣੀ ਪੂਜਾ ਸਰਾਣੀ ਚਾਹੁੰਦਾ ਮਾਨਕ ਠਾਕਰ ਅਗੰਮ ਹੋਵਾ ਨਾਨਕ ਕਹਿੰਦਾ ਠਾਕਰ ਆਇਆ ਉਹ ਅਗੰਮ ਬਾਹਰ ਉਹਦਾ ਅਗੰਮ ਬਾਹਰ ਆ ਉਹਦੀ ਬਰਾਬਰੀ ਤਾਂ ਨਹੀਂ ਕਰ ਸਕਦਾ ਫੇਰ ਵੀ ਉਹਨੂੰ ਨਹੀਂ ਰੋਕ ਸਕਦਾ ਪਰ ਇਹ ਜਿਹੜਾ ਜੀਰੂ ਜ਼ਬਰਦਸਤ ਸਰਕਾਰ ਤਾਂ ਨਹੀਂ ਫੇਲ ਕਰ ਸਕਦੇ ڈاکੂ ڈاکਕੇ ਜੂੜ ਮਾਰਦੇ ਨੇ ਸਰਕਾਰ ਨੂੰ ਥੋੜੀ ਬੋਦੀ ਪਰੇਸ਼ਾਦੀ ਵੀ ਪੈਦਾ ਕਰ ਸਕਦੇ ਨੇ ਪਰ ਨੁਕਸਾਨ ਆਪਣੇ ਕਰਦੇ ਵੀ ਵੇ ਦੇ ਨੇ ਨਾ ਦਿੱਤੂ ਜਾਣ ਨਾ ਰਾਤ ਨੂੰ ਜਾਣ ਜਾਣ ਉਹਨਾਂ ਦੀ ਹੋ हां करता हो कामों पर है परमेश्वर नु कोई खतरा नहीं है ना तो परमेश्वर नु कोई खतरा नहीं है नु नुकसान नहीं जरूर तो ओनु एक खतरा है परमेश्वर नु सरकार नु एक खतरा है सरकार नु इना दी चिंता चकनी पेंदी है ते जेड़ा नु भी सुधार का लिखना पेंदा ते भाई बंदे दा अपने ने بگੜ गए ना नु सुधारिए ओ सुधार दा फिक्र सरकार नु हो जंदा वे नु सुधारिए ਸੱਤਾ ਜੋ ਸੱਤਾ ਨੂੰ ਬੜੀ ਮੋਟੀ ਇਹ ਦੀ ਵੀ ਨੇ ਸਰਫ ਕੀ ਜਿੱਤਦਾ ਪਰਮੇਸ਼ਰ ਨੂੰ ਵੀ ਥੋੜੀ ਬਹੁਤੀ ਚਿੰਤਾ ਹੀ ਪੈਦਾ ਕਰ ਦਿੰਦਾ ਜਿਹਨਾਂ ਦੇ ਮਨ 'ਤੇ ਕਾਬੂ ਨਾ ਉਹਨਾਂ ਨੇ ਪਰਮੇਸ਼ਰ ਬਾਅਦ ਤੇ ਵੀ ਚਿੰਤਾ ਖੜੀ ਕੀਤੀ ਕਿ ਉਹਦੀ ਔਲਾਦ ਨੇ ਨਾ ਤੇ ਔਲਾਦ ਬਗੜ ਜੇ ਬਾਪ ਨੂੰ ਚਿੰਤਾ ਹੋਏ ਜਾਂਦੀ ਹੈ ਇਹ بڑے ਭਾਈਆਂ ਨੂੰ ਵੀ ਚਿੰਤਾ ਹੋ ਜਾਂਦੀ ਹੈ ਨਾਲ ਦੇ ਕਬਰ ਨੂੰ ਵੀ ਚਿੰਤਾ ਹੁੰਦੀ ਹੈ ਨਾਲ ਦੇ ਨਾ ਕੋਈ ਬਗਾਨਾ ਕਹੇ ਨਾ ਕੋਈ ਬਹਿਰੀ ਨਹੀਂ ਬਗਾਨਾ ਨਾਲ ਵੀ ਚਿੰਤਾ ਹੁੰਦੀ ਹੈ ਉਹਨਾਂ ਨੂੰ ਦੋ ਯਾਦੂ ਜੇ ਕਾ ਪੈਦਾ ਕਰਦੇ ਨੇ ਆਪ ਖੁਆਰ ਹੁੰਦੇ ਨੇ ਖੁਆਰ ਤਾਂ ਆਪ ਹੁੰਦੇ ਨੇ ਹਰ ਬਿਸਰਤ ਸਦਾ ਖੁਆਰ ਇਹ ਹੁੰਦੇ ਨੇ ਚਲਿੱਤਰ ਕਰਕੇ ਪਰੇਸ਼ਾਨ ਨੂੰ ਨਰਜਨ